ਤਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਨੇ ਪੰਚ ਸਤਵਹ ਦੂਤ ਕਬਨ ਵਿਧੀ ਮਾਰਨੇ ਪ੍ਰਭ ਦੇ ਪ੍ਰੇਮ ਕਾਰਨ ਦਸ਼ਾ ਦਿਸ਼ਾਵਾਂ ਚ ਨਾ ਫਗਰੇ ਰਹਿਣ ਲੱਭ ਰਹੇ ਪਰ ਜਿਹੜੇ ਪੰਚ ਦੂਤ ਨੇ ਇਹ ਵਾਲਾ ਤੰਕਰ ਦਿੰਦੇ ਇਹ ਆਪਣੇ ਵੱਲ ਇਹ ਉਹਦੋਂ ਨਹੀਂ ਆਉਂਦੇ ਆਪਣੇ ਵੱਲ ਖਿੰਦੇ ਨੇ ਲੋਭ ਆਪਣੇ ਵੱਲ ਖਿੰਦਾ ਇਹ ਧਿਆਨ ਆਪਣੇ ਵੱਲ ਖਿੰਦਾ ਹੈ ਇਹਨਾਂ ਨੂੰ ਫਲਾਕ ਕੇ ਮਾਰਿਆ ਜਾਵੇ ਇਸ ਤੋਂ ਨੇ ਇਹ ਬੇਲਪਾਉਂਦੇ ਨੇ ਪ੍ਰਿੰਟ ਕਰਨ ਤੇ ਨੇ ਅੱਛਾ ਜੀ ਇਹ ਜਿਹੜਾ ਦੱਸਾ ਅਨੇਕ ਦਾਸਤਾ ਨਹੀਂ ਹੈ ਅੱਛਾ ਅਨੇਕ ਦਿਸ਼ਾਵਾਂ ਵਿੱਚ ਤਾਉਂਦੇ ਅਨੇਕਾਂ ਯਤਨ ਕਰ ਠੀਕ ਹੈ ਜੀ ਤੀਖਣ ਬਾਣ ਨਾਮ ਪ੍ਰਭ ਧਿਆਈਐ ਹਰ ਹਾਂ ਮਹਾ ਵਿਖਾਦੀ ਕਾ ਪੂਰਨ ਗੁਰ ਪਾਈ ਹੈ। ਤਿਕਨ ਬਾਣ ਚਲਾਏ ਬਥੇਰੇ ਕਿੱਥੇ تیر ਚਲਾਏ ਨੇ ਇਹਨਾਂ ਤੇ ਕਿੱਕੇ ਪੈਂਦੇ ਨੇ ਤੇ ਤੀਖਣ ਬਾਣ ਚਲਾਏ ਬਾਣੀ ਦੇ ਕੋਣ ਚਲਾਏ ਮਾਮ ਕਦ ਤੇ ਆਈ ਹੈ। ਤਾਂ ਨਾਮ ਦੇ ਵਿੱਚ ਆਂਡਰ ਲੋ ਇਹਨਾਂ ਚਲਾਉਂਦੇ ਲੋਬ ਦੇ ਕੇ ਨਹੀਂ ਬਿਠਾਉਂਦੇ। ਕੋਈ ਉਹਨਾਂ ਜਵਾਬ ਨਹੀਂ ਦਿੰਦੇ ਭਾਈ ਸਾਦੇ ਵਾਸੀ ਨਹੀਂ ਹੈ। ਇਹ ਗੱਲ ਇਹ ਜਿੰਨਾ ਜਦ ਤਖੇ ਬਾਣ ਨਹੀਂ ਜਲਾਉਂਦੇ ਉਹਨਾਂ ਚਰ ਇਹ ਕਹਿਣ ਦੀਏ ਪਾਸੇ ਨਹੀਂ ਜਾਣ ਦਿੰਦੇ ਗੁਰਬਾਣੀ ਦਾ ਉਪਦੇਸ਼ ਵਾਲੇ ਨੇ ਕਿ ਮੈਂ ਧਿਆਨ ਜੋੜਨਾ ਹੈ ਇਹੀ ਦਾਸਰੀਏ ਗੁਰਬਾਣੀ ਇਹੀ ਤੀਖਣ ਬਾਣ ਜੇ ਮਨ ਨਾਲ ਨਹੀਂ ਵਾਲੀ ਨੂੰ ਫਿਰ ਨਹੀਂ ਧਿਆਨ ਜੁੜ ਸਕਦਾ ਧਿਆਸਰ ਦੇ ਮਨ ਨਾਲ ਤੀਖਣ ਬਾਣ ਮਨ ਨੂੰ ਤਿੱਖੇ ਲੱਗਦੇ ਨੇ ਮਨ ਠੀਕ ਹੈ ਜੀ ਬਾਕੀ ਸਮਾਜ ਨੂੰ ਸੰਸਾਰ ਨੂੰ ਵੀ ਤਿੱਖੇ ਲੱਗਦੇ ਆ ਜੀ ਜੇ ਸਮਾਜ ਦਾ ਤੋੜਦੇ ਨੇ ਜਾਂ ਜਿਹੜੀ ਤੋੜਨਾਂ ਦੀ ਗੱਲ ਹੈ ਸਮਾਜ ਤੋਂ ਪੂਰੇ ਗਿਆਨ ਵਾਲੇ ਕਾਇਲ ਹੁੰਦੇ ਨੇ ਉਦਾਂ ਨਹੀਂ ਮੰਦੇ ਹੁੰਦੇ ਗੁਰਮਤਿ ਸੋਝੀ ਨਾਲੇ ਸ਼ਾਂਤ ਹੁੰਦੇ ਨੇ ਐਵੇਂ ਅgetElementById ਉਹ ਤਾਂ ਮੌ ਪੈਦਾ ਕਰਦੇ ਨੇ ਉਹ ਤਾਂ ਜੇ ਮੰਦਿਆ ਇੱਥੇ ਪੂਰੀ ਅਕਲ ਵਾਲਾ ਜਿਹੜਾ ਮੱਤ ਹੈ ਮੰਦਿਆ ਇੱਥੇ ਪੂਰੀ ਅਕਲ ਵਾਲੀ ਮੱਤਾ ਉਹ ਨਹੀਂ ਨੂੰ ਨੁਕਾਲ ਕਰ ਸਕਦੀ ਉਹਨਿਆਂ ਤਾਂ ਖੜੇ ਛਡਾ ਸਕਦੀ ਮਨੁੱਖਤਾਲੇ ਦੇ ਲੋਗ ਇਹਨਾਂ ਨੂੰ ਖੜੇ ਛਡਾਉਂਦੇ ਉਹ ਤਾਂ ਹਲਲ ਹੋਈ ਦਿੰਦੇ ਨੇ ਲੋਕ ਕਰਦੇ ਨੇ ਲੋਕ ਨੂੰ ਕਰਦੇ ਨੇ ਹਾਂਜੀ ਹੁੰਦਾ ਜੀ ਕੀਤਾ ਹੋਇਆ ਹੈ ਅਸਲ ਵਿੱਚ ਦੁਨੀਆ ਨਾਲ ਮੇਲ ਨਹੀਂ ਕਰਦੇ ਦੁਨੀਆ ਕੇ ਹੋਇਆ ਠੀਕ ਹੈ ਕੀ ਕਹਿਣਾ ਚਾਹੁੰਦੇ ਵੀ ਮਹਾ ਬਿਖਾਦੀਆਂ ਦਾ ਘਾਤ ਕਰਤਾ ਪੂਰਨ ਗੁਰ ਗੁਰ ਦੇ ਗਿਆਨ ਨਾਲ ਹਾਂਜੀ ਹਾ ਹੋਈ ਨਹੀਂ ਜ਼ਿਆਦਾ ਪੂਰਾ ਗਿਆਨ ਨਹੀਂ ਹੋਊਗਾ ਇਹਨਾਂ ਦਾ ਕਾਤ ਨਹੀਂ ਹੁੰਦਾ ਉਹਨਾਂ ਚਰ ਇਹ ਜਗ ਵਿੱਚ ਨਹੀਂ ਹੁੰਦੇ ਉਹਨਾਂ ਚਰ ਜਗ ਵਿੱਚ ਆਉਣੇ ਫਿਰ ਤਰਕੀ ਜਾਂ ਮੈਂ ਅਗਿਆਨਤਾ ਕਰਕੇ ਪੈਦਾ ਹੋਏ ਹੋਏ ਆ ਜਦੋਂ ਪੂਰਾ ਗਿਆਨ ਪਾਇਆ ਗਿਆ ਫਿਰ ਇਹ ਦਬ ਜਾਂਦੇ ਹਾਂ ਜੀ ਹੁਣ ਜੋਰ ਜਾਂ ਰੋਸ਼ਨੀ ਹੁੰਦੀ ਤੈਨੂੰ ਜੋਰ ਆਪੇ ਚੁੱਪ ਕਰ ਜਾਂਦਾ ਵੀ ਨੇ ਤਸਕਰ ਦੇਨ ਥੋੜੀ ਤਸਕੀ ਕਰਦੇ ਨੇ ਤੇ ਨੇਰੇ ਚ ਕਰਦੇ ਨੇ ਅਗਿਆਨਤਾ ਦੇ ਘਰ ਦੇ ਲਈ ਠੀਕ ਹੈ ਇੱਥੇ ਹਰ ਹਾਂ ਦਾ ਕੀ ਭਾਵ ਹੈ ਜੀ ਪੂਰੇ ਗਿਆਨ ਤੇ ਬਣਾ ਨਹੀਂ ਗੱਲ ਬੰਦੀ ਕੋਈ ਕੋਈ ਕਰ ਸਕਦਾ ਪੂਰਾ ਗਿਆਨ ਤੁਹਾਨੂੰ ਹੀ ਪਊਗਾ ਮੈਂ ਤਾਂ ਦੱਸ ਸਕਦਾ ਤੁਹਾਨੂੰ ਇਹ ਪ੍ਰਾਪਤੀ ਆਪ ਕਰਨੀ ਪਏਗੀ ਬਿਲਕੁਲ ਅੰਦਰ ਆਪਣੀ ਚਾਹ ਆਪ ਕਰਨਾ ਪਊਗਾ ਲੁੱਟ ਅੰਦਰ ਬਚੀ ਹੋਈ ਹੈ ਤੇ ਚਾਹ ਬਾਹਰ ਕਰੇ ਤੇ ਕੀ ਫਾਇਦਾ ਹੋਊ ਜਿਹਦੇ ਅੰਦਰ ਚੰਦ ਹੈ ਉਹ ਆਪਣੇ ਅੰਦਰ ਦੀ ਲੁੱਟ بچਾ ਸਕਦਾ ਹੈ ਬਾਹਰ ਦੀ ਨਹੀਂ بچਾ ਸਕਦਾ ਦੁਵੇਦੀ ਠੀਕ ਹੈ ਜੀ ਇੱਥੇ 16ਵੇਂ ਛੰਦ ਦੀ ਸਮਾਪਤੀ ਹੈ ਜੀ